ਸ਼ਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖੀ ਪਾਇਆ ਜਾਏ ਮਨਮੁਖ ਘਰ ਹੁੰਦੀ ਵਸ ਵਤ ਨ ਜਾਣਨੀ ਅੰਦੇ ਭੌਂਕ ਮੂਏ ਨਾਮ ਸਭ ਦੇ ਅੰਦਰ ਹੈ ਗੁਰਮੁਖ ਇਹਦੇ ਨਾਲ ਸੰਪਰਕ ਰੱਖਦਾ ਹੈ ਅਸਰਾਪਾ ਆਵਾਜ਼ ਅਨੁਸਾਰ ਚੱਲਦੇ ਨੇ ਗੁਰਸਿੱਖ ਵਿਵਲਪੂਰੀ ਹੁੰਦੀ ਹੁੰਦੀ ਕਿੱਥੇ ਤੱਕ ਪਹੁੰਚ ਜਾਂਦੀ ਹੈ ਜਿਹੜੇ ਇਹ ਮਨੋਖਲਾ ਅੰਤਰਾਤਮਾ ਦੀ ਆਵਾਜ਼ ਸੁਣਦੇ ਨਹੀਂ ਭੌਂਕੀ ਜਾਂਦੇ ਨੇ ਐਵੇਂ ਖਾਮ ਖਾਦੇ ਮਤਲਬ ਸ਼ੁਰੂ ਹੋਈ ਇਹ ਗੱਲ ਆ ਨਾ ਤੇਨੇ ਜੇ ਨਾਮਧਾਨ ਦਾ ਨਾ ਇਹ ਸਭ ਦੇ ਖੋਜ ਲੰਦਾਂ ਗੁਰਮੁਖ ਢੂਢ ਟਡੇ ਹਰ ਜਣ ਲੱਦਾ ਰਾਹ ਅੰਤਰਾ ਲੱਭ ਜਾਂਦਾ ਉਹਦੇ ਠੀਕ ਹੈ ਮਨਮੁਖ ਘਰ ਹੋਣ ਦੀ ਵਤਨਾ ਜਾਣਨੀ ਅੰਦੇ ਭੌਂਕ ਮੂਏ ਬਿੱਲਾਂ ਉੱਦਾ ਮੂੰਖਾਂ ਵੀ ਅੰਦਰ ਅੰਤਰਾ ਦੇ ਵੀ ਨਹੀਂ ਜਾਣਦੇ ਇਸ ਜਨ ਨੂੰ ਵੀ ਇਹ ਕੀ ਕੀ ਹੈ ਇਹ ਕਰਕੇ ਉਹ ਮੂੰਹ ਆਈ ਪੋਕੀ ਜਾਂਦੇ ਨੇ ਅੰਤਰਮੁਖੀ ਨਹੀਂ ਹੁੰਦੇ ਬਾਰਮੁਖੀ ਬੋਲੀ ਨੇ ਮਾਇਆ ਦੀ ਠੀਕ ਹੈ ਤੀਜਾ ਕੰਚਨ ਨਿਰਮਲੀ ਜੋ ਸੱਚ ਨਾਮ ਸੱਚ ਲੱਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖੀ ਪਰਮਪਉ ਭਾਗੀ ਜਿਹੜੀ ਅੰਦਰਲੀ ਕਾਇਆ ਨੂੰ ਉਦਲਾ ਸ਼ਰੀਰ ਹਾਂਜੀ ਮਾਇਆ ਵੀ ਉਦ ਹੀ ਹੋ ਕੱਚਣ ਕੱਚ ਹੈ ਉਹ ਕੱਚਰ ਬਣੇ ਕੱਚੀ ਬਾਣੀ ਗੁਰਬਾਣੀ ਨੂੰ ਕਹਿੰਦੇ ਨੇ ਪੱਕਾ ਕਰਕੇ ਬੋਲ ਕੇ ਮਹਿਲ ਜਿਹੜੀ ਕਾਇਆ ਅੰਦਰ ਹੈ ਤੱਕੀ ਪੱਕੀ ਹੈ ਕੰਚਣ ਕੱਚ ਹੈ ਉਹਦੇ ਚ ਕੱਚ ਕੋਈ ਨਹੀਂ ਹੈ ਉਹ ਠੀਕ ਹੈ ਧਰਮਲੀ ਜੇ ਧਰਮਲੀ ਹੋ ਜਾ ਫਿਰ ਤਾਂ ਕੀ ਹੰਤਾ ਕੋਣ ਕਰਕੇ ਬਲੀਦਾਨ ਜੋ ਸੱਚ ਨਾਮ ਲੱਗ ਜੇ ਸੱਚ ਨਾਮ ਜੁੜ ਗਈ ਜੇ ਸੱਚ ਨਾਲ ਲੱਗ ਗਈ ਫਿਰ ਧਰਮਲੀ ਇਹੋ ਨਹੀਂ ਤਾਂ ਫਿਰ ਬਲੀਦਾਨ ਚ ਹੈ ਪਾਖਾ ਜਮਣ ਵਾਲ ਨੂੰ ਉਹਨਾਂ ਜਿਹੜੇ ਜਨਾ ਜਰਮਨੀ ਹਿੰਤਾ ਹਾਂਜੀ ਕਿ ਕਿ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖੀ ਬ੍ਰਹਮ ਭੋ ਭਾਗੀ ਨਿਰਮਲ ਜੋਤ ਨਿਰੰਜਨ ਪਾਇਆ ਜਿਹੜੀ ਜੋਤ ਨਿਰਮਲ ਹੋ ਜਾਂਦੀ ਹੈ ਉਹਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ ਮਾਇਆ ਅਗਿਆਨ ਉਹ ਨਿਰੰਜਨ ਅਜੇ ਇਹ ਸਰੀਰ ਆ ਨਾ ਇਹਨੂੰ ਉੱਜਰ ਕਹਿੰਦੇ ਨੇ ਮਾਇਆ ਨੂੰ ਉੱਜਰ ਕਹਿੰਦੇ ਅਗਿਆਨ ਮਾਇਆ ਨਰੰਜਨ ਰਹੀ ਆ ਜੋ ਜੁਗਤ ਇਹ ਵਸਾਈ ਹੈ ਮਾਇਆ ਤੋਂ ਲੈ ਬੋ ਜਾਂਦਾ ਬਨ ਨਿਰੰਜਨ ਮਨ ਕਰ ਕੇ ਮਾਇਆ ਦਾ ਮੋਛੂ ਤੇ ਦੇਖੇ ਨਾ ਰਿਜਣ ਜਿਵੇਂ ਨਾ ਸੱਚ ਹੈ ਮਾਇਆ ਝੂਠ ਹੈ ਦੀ ਪ੍ਰਾਪਤੀ ਹੋ ਗੁਰਮੁਖੀ ਪ੍ਰਮਾਤਮਾ ਦੂਰ ਹੋ ਜਾਂਦਾ ਇੱਥੇ ਗੁਰਮੁਖੀ ਕਿਉਂਕਿ ਹੈਗਾ ਇਸਤਰੀਵਾਦਿਕ ਸ਼ਬਦ ਤਾਂ ਹੀ ਭਾਗੀ ਅੱਖਰ ਆਇਆ ਹੈ ਜੀ ਹਾਂ ਜੀ ਆ ਆਇਆ ਨਾ ਫਿਰ ਬੁੱਧੀ ਰਹਿ ਜਾਂਦੀ ਹੈ ਉਦੋਂ ਜਾ ਕੇ ਇਕਾਪੁਰਖ ਸੁਭਾਈ ਨਾਰ ਦਾ ਵੀ ਮਤਲਬ ਇਹੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਇਕਾਪੁਰਖ ਸੁਭਾਈ ਨਾਰ ਕਿਉਂ ਕਿਹਾ ਉਦੋਂ ਬੁੱਧੀ-ਬੁੱਧੀ ਰਹਿ ਜਾਂਦੀ ਹੈ ਕਿ ਤਰਵਾਂਗੇ ਨਾ ਰਹਿੰਦੇ ਬੁੱਧੀ ਬੜ ਜਾਂਦੀ ਹੈ ਉਹ ਠੀਕ ਹੈ ਉਹਨੂੰ ਆਪ ਚੰਡੀ ਵੀ ਕਹਿੰਦੇ ਆ ਹਰੂ ਹੈ ਕਿਹਾ ਹੋਇਆ ਸਭ ਕੁਝ ਠੀਕ ਹੈ ਜੀ ਨਾਨਕ ਗੁਰਮੁਖੀ ਸਦਾ ਸੁਖ ਪਾਵੇਂ ਅੰਦਨ ਹਰ ਬੈਰਾਗੀ ਸਦਾ ਸੁਖ ਪਾਵਣਾ ਅਦੇ ਕੋ ਗੁਰਮੁਖੀ ਵੀ ਹੋਣ ਇਸ ਤਰੀਕੇ ਨਾਲ ਬਸ ਦੇਖ ਲਓ ਖੱਖੇ ਨੂੰ ਤਿਆਰੀ ਹੈ ਸਦਾ ਸੁਖ ਪਾਵਣਾ ਸਦਾ ਹੀ ਸੁਖੀ ਬਸ ਇਹਨੇ ਅੰਦਰੋਂ ਰਹਿੰਦੀ ਹੈ ਬੈਰਾਗੀ ਦਾ ਮਤਲਬ ਉਹਨਾਂ ਦੀ ਕੋਈ ਇੱਛਾ ਹੀ ਨਹੀਂ ਹੁੰਦੀ ਉਹਨਾਂ ਦੇ ਬੈਰਾਗ ਹੁੰਦਾ ਆਪਣਾ ਰਾਗ ਦੀ ਕੋਈ ਹੁੰਦਾ ਬੈਰਾਗ ਲੇਵ ਲੱਗੀ ਬੈਰਾਗੀ ਹੈ ਹਰ ਰੂਪ ਹੋ ਗਏ ਉਹ ਵੀ ਹਰ ਰੂਪੇ ਵਰਦੇ ਹਰ ਵਰਦੇ ਜੇ ਸਾ ਤੇਵੇ ਤੈਸਾ ਹੋਏ ਫੈਰਾਗੀ ਜਿਹੜਾ ਹਰੇ ਠੀਕ ਹੈ ਜਿੰਨਾ ਚਰਮਾਇਆ ਦੀ ਹੈ ਜਿੰਨਾ ਚ ਰਾਜਮਾਲ ਬੰਸੋਰ ਮੈਂ ਜਿਹੜਾ ਰਾਗੀ ਹੈ ਫਿਰ ਬੈਰਾਗੀ ਆ ਬੈਰਾਗੀ ਆ ਹਰ ਕਾ ਹੋ ਗਿਆ ਯਾਨੀ ਹਰੇ ਰਹਿ ਗਿਆ ਬਨ ਰਿਹਾ ਹੀ ਦੀ ਧੰ ਦਾ ਮਤਲਬ ਹੈ ਫੈਰਾਗੀ ਮਨ ਮਰ ਗਿਆ ਹੋ ਗਿਆ ਹਾਂਜੀ ਹਰ ਦੇ ਵਿੱਚ ਹੋ ਗਿਆ ਹਲਕਾ ਰੂਪੇ ਹੋ ਗਿਆ ਠੀਕ ਹੈ ਜੀ ਪਉੜੀ ਸੇ ਗੁਰਸਿੱਖ ਤਨ ਤਨ ਹੈ ਜਿਨਿ ਗੁਰੂ ਉਪਦੇਸ਼ ਸੁਣਿਆ ਹਰ ਕੰਨੀ ਗੁਰ ਨਾਮ ਦਿਲੜਾਇ ਤਿੰਨ ਹਉਮੈ ਦੁਬਿਦਾ ਪੰਨੀ ਸੇ ਗੁਰਸਿੱਖ ਤਦ ਤਨ ਜਿਹੜੇ ਗੁਰਸਿੱਖ ਐਸੇ ਗੁਰਸਿੱਖ ਤਦ ਤਨ ਨੇ ਜਿਨਿ ਗੁਰੂ ਉਪਦੇਸ਼ ਸੁਣਿਆ ਹਰ ਅੰਦੀ ਜਾਨੇ ਗੁਰਤਾਪ ਹਾਰੇ ਸੁਣਿਆ ਤੱਤ ਨੂੰ ਤੱਤ ਸੁਣਿਆ ਉਹਨਾਂ ਨੇ ਉਹਨੇ ਸੁਣਿਆ ਲੌਕਡਾਊਨ ਦੀ ਗੱਲ ਛੱਡ ਦੋ ਉਹਦਾ ਸਾਰ ਸੁਣ ਲਿਆ ਉਹਦੇ ਵਿੱਚ ਗਿਆਨ ਜਿਹੜਾ ਹੈਗਾ ਉਹ ਸੁਣ ਲਿਆ ਗਿਆਨ ਸਮਝ ਲਿਆ ਤੱਕੀ ਤਾਂ ਪੜੇ ਸੁਣ ਕੇ ਆਏ ਸਹਿਜ ਨਾ ਮਿਲਿਆ ਸੋਏ ਉਹਨਾਂ ਨੇ ਕੰਨਾਂ ਨਾਲ ਉਹ ਸੁਣਿਆ ਜੋ ਸਾਰ ਹੈ ਉਹਦਾ ਸੁਣਿਆ ਕਦੀ ਲੋ ਜੀ ਗੁਰ ਸਤਗੁਰ ਨਾਮ ਦਰੜਾਇਆ ਤਿੰਨ ਹਮੇਂ ਦੁਬਦਾ ਮੁਰਫਤ ਕਹਤ ਕੋਲ ਨਾ ਐਸਾ ਦਰਦ ਕਰਵਾਇਆ ਉਹ ਮੇਰੇ ਸੁਭਾ ਦਾ ਦੋਨੇ ਪੱਟ ਦਿੱਤੀ ਦੋਨੇ ਨਾਸ ਕਰ ਦਤੀ ਹੈ ਦੋਨਾਂ ਦਾ ਹੀ ਨਾਸ ਬਿਲਕੁਲ ਬਿਲਕੁਲ ਬਿਲਕੁਲ ਉਹ ਮੇਨ ਹੈ ਉਹ ਜਿਹੜਾ ਵਿਰੋਧ ਕਰ ਤੇ ਨਾ ਹੁਕਮਦਾਰ ਉਹਨੂੰ ਮਿੱਠਾ ਨਹੀਂ ਸੀ ਲੱਗਦਾ ਮਠਾ ਲੱਗਣ ਲੱਗਿਆ ਉਹ ਬਖਤਮਾ ਹੋ ਗਈ ਠੀਕ ਹੈ ਜੀ ਦਾ ਮਤਲਬ ਵਿਰੋਧ ਕਰਨਾ ਜੇ ਰਾਮ ਦਾ ਵਿਰੋਧ ਨਹੀਂ ਕਰਦਾ ਉਹ ਵੀ ਭੱਦੀ ਕੋ ਮਿੱਤਰ ਨਹੀਂ ਵਿਚਾਰ ਡਿੱਠਾ ਕੋ ਮਤਲਬਾਂ ਸੰਸਾਰ ਕੋਈ ਮਤਲਬ ਨਹੀਂ ਹੈਗਾ ਨਾਮ ਤੋਂ ਬਨਾ। ਉਹ ਚਲਦਿਆ ਇਹ ਨਾਲ ਇਹਨੇ ਜਾਣਾ ਨਾਮ ਨਹੀਂ। ਜੈ ਮਾਤਾ ਪਿਤਾ ਸੁਤ ਮੀਤਨਾ ਭਾਈ ਉਹ ਨਾਮ ਇਹ ਇਹਦੇ ਬਿਨਾ ਮਿੱਤਰ ਕੌਣ ਹੋਇਆ? ਇਹਦੇ ਬਿਨਾ ਕੋਈ ਹੋਇਆ ਮਿੱਤਰ? ਠੀਕ ਹੈ ਜੀ ਜਿੱਦ ਤੱਕ ਉਹ ਕਹਾ तो ਤਰ ਕੇ ਆਰਾਮ ਕੀਤੋ ਉੱਪਰ ਛਾਮ ਉਹ ਪੜ ਲੋ ਨਾ ਸਾਰੀ ਇਸ ਪਰੀਗਤ ਚੁਰਿਤ ਕੀ ਲਿਖਿਆ ਹੋਇਆ ਹਣੇ ਐਸੇ ਦੀ ਵਿਆਖਿਆ ਠੀਕ ਹੋ ਜੀ ਵਿਚਾਰ ਡਿੱਠਾ ਹਰ ਜੰਨੀ ਹਰ ਜਨਾਂ ਨੇ ਵਿਚਾਰ ਲਿਆ ਜੀ ਪੁਰਾਣੇ ਤਾਂ ਇਹਨੇ ਸਤਿਗੁਰੂ ਕੀ ਗੱਲ ਮੰਨੀ ਗੁਰੂ ਉਪਦੇਸ਼ ਨਾਲ ਜਿਹਨਾਂ ਨੂੰ ਸੁਤਿਸ਼ਟ ਕਰ ਦਿੱਤਾ ਉਹਨਾਂ ਨੇ ਸਤਿਗੁਰ ਦੀ ਗੱਲ ਹੋ ਗਏ ਸਮਝ ਕੇ ਹਾਂ ਗੱਲ ਠੀਕ ਹੈ ਉਹਦੀ ਬੁੱਧ ਐਸੀ ਸੀ ਉਹ ਸੰਦੇ ਸੰਦੇ ਹੜੀ ਹੜੀ ਸੰਤੁਸ਼ਟ ਗੱਲ ਤਾਂ ਠੀਕ ਹੈ ਉਹ ਸੰਤੁਸ਼ਟ ਹੋ ਚਲੇ ਗਏ ਉਹਨਾਂ ਨੇ ਮੰਨ ਲਈ ਫਿਰ ਮੰਨੇ ਦੀ ਤਾਂ ਗੱਲ ਅਖੀਲ ਦੀ ਆ ਮੰਨੇ ਕੀ ਗੱਟ ਕਹੀ ਨਾ ਜਾਏ ਫਿਰ ਤਾਂ ਕਹਿੰਦੇ ਉਹਦੀ ਗੱਲ ਦੀ ਫਿਰ ਕਰ ਸਕਦੇ ਸੰਤੁਸ਼ਟੀ ਤਾਂ ਪਹਿਲਾ ਪਹਿਲਾਂ ਦਾ ਗੱਲ ਕੀਤੀ ਐ ਅੱਛਾ ਜੀ ਤੂੰ ਜਦ ਬੰਨ ਜਿਹੜਾ ਸੰਤੋਸ਼ ਹੋ ਗਿਆ ਮੰਨ ਲਈ ਗੱਲ ਸੰਤੁਸ਼ਟ ਹੋ ਕੇ ਮੰਨੀ ਐ ਨਾ ਗੱਲ ਹਾਂਜੀ ਮੰਨੇ ਕੀ ਗੱਟ ਕਹੀ ਨਾ ਜਾ ਫਿਰ ਕਿੱਥੇ ਕਿੱਡੀ ਛੇਤੀ ਪਹੁੰਚੂ ਇਹ ਉਹਦੇ ਮੰਨਣ ਦੇ ਇੜਤਾ ਤੇ ਖੜੀ ਆ ਗੱਲ ਜਿਹੜ ਠੀਕ ਹੈ ਜੀ ਹਾਂ ਜੀ ਜੋ ਗੁਰਮੁਖ ਨਾਮ ਧਿਆਇਂਦੇ ਕਿੰਨੀ ਚੜੀ ਚਵਗਣ ਵੰਨੀ ਆਹਾ ਆਹਾ ਜੋ ਗੁਰਮੁਖ ਨਾਮ ਧਿਆਇਂਦੇ ਜਿਹੜੇ ਗੁਰਮਖਾ ਦਾ ਰੂਪ ਧਿਆਨ ਨੂੰ ਉਹਨਾਂ ਦਾ ਦਾ ਰੂਪ ਚੜਦਾ ਨਖਾ ਚੜਦਾ ਰੰਗ ਚੜਦਾ ਰੰਗ ਰੂਪ ਦੁਬਣੀ ਰਾਤ ਚੌਗੜੀ ਚਵਣ ਠੀਕ ਉਹਨਾਂ ਤੇਰਾ ਨੋਮਦਾਰਾਂ ਤੇ ਚੜਦਾ ਵਨ ਵਨ ਹੁੰਦਾ ਨਾਲ ਰੂਪ ਹਾਂਜੀ ਠੀਕ ਹੈ ਜੀ ਇੱਥੇ 12ਵੀਂ ਫੌਰੀ ਸਮਾਪਤੀ ਹੈ ਜੀ